ਸਲੋਗ ਯਾਸ ਜਬਤ ਮਨ ਹੋਏ ਆਨੰਦ ਵਿਣਸੇ ਦੂਜਾ ਭਾਵ ਜਿਹਦੇ ਜਪਣ ਨਾਲ ਮਨ ਹੋਏ ਆਨੰਦ ਮਨ ਨੂੰ ਆਨੰਦ ਆਵੇ ਵਿਣਸੇ ਦੂਜਾ ਭਾਵ ਉਹ ਦੂਜਾ ਭਾਵ ਬਣਸੀ ਫੇ ਮਾਇਆ ਦੀ ਤੋਖ ਬਣਸੀ ਕੋਤਾ ਜਾ ਪਹਤਾ ਠੀਕ ਜੇ ਜਗਰੋਜ ਕਰਦਾ ਅਸ਼ਰਤ ਪੂਰੀ ਨਹੀਂ ਨਾਂਦੇ ਦੂਜਾ ਪੋਬਨਸਾ ਦੀ ਮੰਨ ਕੇ ਅਨੰਦਰੀ ਪੈਦੌਨ ਦਾ ਫੇਰ ਮਾਰਾ ਫੇਜ ਦਾ ਜਫਰ ਦਾ ਕੁਝ ਨਹੀਂ ਫਿਰ ਉਹ ਸਮਝ ਲਵੇ ਗਲਤ ਕਰ ਰਿਹਾ ਮੈਂ ਮੰਨੋ ਅਨੰਦ ਹੋਣਾ ਜਾਇਦਾ ਰੋਜ਼ ਜਿੰਨੀ ਕਾ ਰੋਟੀ ਖਾ ਲਈ ਉਨੀ ਦਾ ਭੁੱਖ ਦੂਰ ਹੋਵੇ ਇਹ ਦੋ ਬੁਰਕੀਆਂ ਖਾ ਲੀਆਂ ਦੋ ਬੁਰਕੀਆਂ ਦਾ ਆਸਰਾ ਤਾਂ ਹੋ ਰੋਜ਼ ਇਹ ਆਸਰਾ ਇਹ ਨਹੀਂ ਕੁਝ ਹੋ ਰਿਹਾ ਜਿੰਨੀ ਗੱਲ ਸਮਝ ਆ ਗਈ ਉਹਨਾਂ ਦਾ ਆਸਰਾ ਆਇਆ ਕਿ ਕੁਝ ਅੱਜ ਮਿਲਿਆ ਨਾਜ਼ੁੜਿਆ ਜਿਹਦੇ ਨਾਲ ਮਨ ਨੂੰ ਆਰਾਂਦਾਵੇ ਵਿਰਸੇ ਦੂਜਾ ਪੌਂ ਆਰ ਦੂਜਾ ਪੌਂ ਦਿੰਸੇਵੇ ਦੂਜੇ ਪੌਂ ਦਾ ਨਾਸ ਹੋਵੇ ਮਾਇਆ ਦੀ ਕੁਖ ਮਰੇ ਹੂੰ ਦੁੱਖ ਦਾ ਦਰਦ ਕ੍ਰਿਸ਼ਨਾ ਮੁਝੈ ਨਾਨਕ ਨਾਮ ਨੇ ਸਮਾਓ ਦੁੱਖ ਦਰਦ ਤ੍ਰਿਸ਼ਨਾ ਕ੍ਰਿਸ਼ਨਾ ਕਰਕੇ ਦੁੱਖ ਦਰਦ ਹੈ तेजना बुझ के दुखदार नाले चला गया दुखदार के है तृष्णा आजादु तृष्णा आई है ए बुझ बे तृष्णा जे बुझे तृष्णा नाल आया जान दी गल नहीं नाल आई कृष्णा तो दुखदार पैदा होने तृष्णा बड़ी कोई दुखदार ना पे चले गए कृष्णा नहीं तो दुखदार आ बुझे आया है ना गल्ला बुझे ਸ੍ਰੀ ਜਨਾ ਬਰਲੇ ਕੀ 부ਜੀ ਬਰਲੇ ਇਹ ਧੋਖਾ ਹੀ ਦੱਸਦਾ ਧੋਖ ਜੇ ਕਰਦੇ ਪੈਦਾ ਹਣਾ ਧੋਖ ਜਰ ਦਾ ਦੋ ਚੀਜ਼ਾਂ ਹੁੰਦੀਆਂ ਹੀ ਜੜ ਧੋਖਰੀਆ ਜਾਣ ਦਾ ਕਰਦੀ ਹੈ ਦਾ ਦੋਹੇ ਜੋਣੇ ਧੋਖ ਜੇ ਕਰਦੇ ਪੈਦਾ ਹਣ ਨਾਮ ਨਾਮ ਸਮਾਓ ਨਾਮ ਨਾਮ ਸਮਾਓ ਨਾਂ ਕਹਿੰਦੇ ਇਸ ਤਰੀਕੇ ਨਾਲ ਨਾਮ ਸਮਾਓ ਜਿਹੜੇ ਸਮਾਇਆ ਜਾਂਦਾ ਆਤਮ ਰਸ ਦੇਖ ਨਾਲ ਆਤਮਾ ਦੀ ਖੋਜ ਨਾਲ ਆਤਮਾ ਦੇ ਜਪਣ ਨਾਲ ਆਤਮਾ ਦੀ ਸਮਝ ਨਾਲ ਆਤਮ ਗਿਆਨ ਨਾਲ ਕ੍ਰਿਸ਼ਨ ਹੋ ਜਾਂਦੀ ਹੈ ਦੂਜਾ ਬੋਲ ਜੀ ਆਂਦਾ ਨਾਮ ਨੋ ਸਮਾ ਨਾਮ ਨਾਲ ਸਮਾ ਜਾਇਦਾ ਉਹ ਲੋ ਉੱਪਰ ਗੱਲ ਕਹੀਏ ਉਸੇ ਨੂੰ ਦੁਬਾਰਾ